ਸੇ ਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵੜ ਭਾਗੀ ਸੱਚੇ ਸ਼ਬਦ ਜਿਨ੍ਹਾਂ ਏਕ ਲਿਬ ਲਾਗੀ ਅਧੂਰੇ ਸੇਵਣ ਸੇਵੜ ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ ਜਿਹੜੇ ਸ਼ਬਦ ਵਿਚਾਰ ਕਰਦੇ ਨੇ ਸਤਿਗੁਰ ਤੇ ਪਾਣੀ ਚੱਲਦੇ ਨੇ ਉਹਨੂੰ ਪਾਣੀ ਨੇ ਉਹੀ ਵੱਡੀਆਂ ਭਾਸ਼ਾਂ ਵਾਲੇ ਸੰਸਾਰ ਉਹ ਭਾਵੇਂ ਸਾਰੀ ਤਰ੍ਹਾਂ ਦੇ ਕਿੰਨੇ ਵੀ ਗਰੀਬ ਹੋਣ ਔਰ ਰਗਦਾਸ ਵੀ ਹੋਵੇ ਕਹੇ ਤਬੀਰ ਵੀ ਹੋਵੇ ਬੜਵੜ ਬਾਜੀ ਦੇ بڑے بڑے ਰਾਜੇ ਬੜਵੜੇ ਮਾਲਕਿਆ ਤੋਂ ਵਾਲੇ ਬੜਵੜ ਬਾਜੀ ਦੇ ਹੋਰ ਗੁਰਬਾਣੀ ਨੂੰ ਇਹ ਬੜਵੜ ਬਾਜੀ ਸੱਚੇ ਸ਼ਬਦ ਜਿਨ੍ਹਾਂ ਇਹ ਤਲਵਾਂਜੀ ਸ਼ਬਦ ਗੁਰਮਤਿ ਕੇ ਸੋਝੀ ਨਾਲ ਜਿਹੜੇ ਇੱਕ ਵਾਰੀ ਫਿਕਰ ਹੋ ਗਏ ਸਦਾ ਲਈ ਉਹ ਬੜਵੜ ਅਲੀ ਗ੍ਰਹਿ ਕੁਟੰਬ ਮੈਂ ਸਹਜ ਸਮਾਧੀ ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ ਘਰ ਵਿੱਚ ਰਹਿੰਦੇ ਹੋਏ ਵੀ ਕੁਟੰਬ ਦੇ ਵਿੱਚ ਰਹਿੰਦੇ ਹੋਏ ਵੀ ਹੈ ਸਹਜ ਸਮਾਧੀ ਸਹਜ ਵਸਤਾ ਜਿਹੜੇ ਤਰੇ ਰਹਿੰਦੇ ਨੇ ਉਹ ਜਿੱਤਾ ਫਿਕਰ ਨਹੀਂ ਹੁੰਦਾ ਉਹ ਸਹਜ ਵਸਤਾ ਜਿਹੜਾ ਜਾਂਦਰ ਕੰਮ ਕਰਦੇ ਰਹੇ ਆਪਣਾ ਅਦਾਇਸ ਮਾਰਦੇ ਰਹਿੰਦੇ ਨੇ ਇਹ ਸੰਸਾਰ ਦਾ ਕੰਬ ਦਾਪੀ ਚੱਲਦਾ ਰਹਿਣਾ ਰੂਹ ਸੁਝੂਦੀ ਉਹਦੀ ਕਰਦੇ ਜਾਂ ਕਰਦੇ ਹੀ ਉਹ ਚਿੰਤਾ ਨਹੀਂ ਨਾਮ ਰੱਤੇ ਸੱਚੇ ਵੈਰਾਗੀ ਧਾਨ ਕਾ ਦੇ ਰੱਖ ਚੰਗੇ ਸੱਚੇ ਵੈਰਾਗੀ ਤਾਂ ਉਹ ਨੇ ਸੱਚੇ ਵੈਰਾਗੀ ਨੇ ਉਹ ਜਿਹੜੇ ਕਟਾਵ ਦੇ ਵਿੱਚ ਵੀ ਸ਼ਾਇਦ ਅਵਸਥਾ ਚ ਰਹਿੰਦੇ ਨੇ ਹਾਂਜੀ मोहल्ला चौथा गणते सेवना होवै कीता थाए पाए शब्दै स्वाद ना आयो सच न लगू पाऊ संतै देव ना होवै कीता थाए ना न न दूर-दूर स 220 स 100 ने पाठ करने ने भी गिनती है ने भी गिनती कुछ दी फल मिलता है ਇਹ ਇਸ ਫਲਸਫੇ ਆ। ਕਿਰਤੀ ਮਿਰਤੀ ਦੀ ਸੇਵਾ ਕਰਨ ਤੇ ਸੇਵਾ ਹੀ ਦੀ ਹੁੰਦੀ ਕਿਰਤੀ ਜਾਂਦੀ। ਕੀਤਾ ਥਾਏ ਨਾ ਪਾਏ। ਇਹ ਪੈਂਦਾ। ਤੇ ਆ ਥਾਏ ਨਹੀਂ ਪੈਂਦਾ ਇਹ ਕੀਤਾ ਹੋਇ ਕੋਈ ਕਿਹਾ ਭਲੇਖਾ ਪਾਣੀ ਚਰੇ। ਆਪਣੇ ਨਹੀਂ। ਨਹੀਂ ਫਿਰ ਇਹ ਭਲੇਖਾ। ਛੱਬਦੇ ਸਾਧਨ ਆਇਆ ਔਰ ਸ਼ਬਦ ਵਿੱਚ ਨਾਮ ਦਾ ਸਵਾਦ ਹੀ ਨਹੀਂ ਆਇਆ ਕਿਸੇ ਨੂੰ। ਕਿਸੇ ਨੂੰ ਆਇਆ ਹੋਵੇ ਤਾਂ ਦੱਸੇ। ਜਿਹਨੂੰ ਸਵਾਦ ਆਇਆ ਉਹਦਾ ਨਾਮ ਦੀ ਵਿਆਖਿਆ ਕਰ ਸਾਰੇ ਗੱਡ ਨੂੰ ਪੱਖਣ ਵਿੱਚੋਂ ਦਾ ਸਵਾਦ ਜੇ ਕਿਸੇ ਨੂੰ ਆਇਆ ਦੱਤੇ ਗੁਰਬਾਣੀ ਚ ਛਾ ਚ ਪੀਏ ਸੰਸਾ ਚ ਛਾ ਸਭੀ ਤੇਰੀ ਹਾਂਜੀ ਕਬਨੇ ਸਵਾਦ ਨਾ ਆਇਓ ਸੱਚ ਲੱਗੋ ਭਾਓ ਸੱਚ ਦੇ ਨਾਲ ਉਹਨਾਂ ਦਾ ਪਾਉਲੀ ਲੱਗਿਆ ਪ੍ਰੇਮਤੀ ਲੱਗਿਆ ਸੱਚ ਨਾਲ ਪੌਤਾ ਤਾਂ ਨਾਲ ਜੇ ਸੱਚ ਉਹਨੂੰ ਸੱਚੋ ਸਵਾਦ ਆ ਜਾਂਦਾ ਸੱਚ ਨਾਲ ਜੁੜਦੇ ਜੇ ਸੱਚ ਦਾ ਤੇ ਸਾਰਾ ਸਤਗੁਰ ਪਿਆਰਾ ਨਾ ਲੱਗਈ ਮਨ ਹਠੀ ਆਵੇ ਜਾਏ ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਿਛਾਂ ਜਾਏ ਸਤਗੁਰੂ ਸਤਗੁਰ ਪਿਆਰਾ ਨਾ ਲੱਗਈ ਸਤਗੁਰ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ ਸੱਚ ਦਾ ਗਿਆਨ ਉਹਨਾਂ ਨੂੰ ਨਹੀਂ ਕਿੰਦਾ ਲੱਗਦਾ ਗੁਰਬਾਣੀ ਦਾ ਗਿਆਨ ਗੁਰਬਾਣੀ ਦਾ ਗਿਆਨ ਤਾਂ ਸੁਣਦੇ ਨੇ ਆਏ ਲੱਗਦਾ ਜਿਵੇਂ ਵਿੱਚੂ ਲੜ ਜਾਂਦਾ ਨਾਮ ਬੁਝੋੜ ਤੇ ਜਾਣ ਪਿੱਛੂ ਤੇ ਸਾਣਾ ਪਿੱਛੂ ਜਿਹੜਾ ਲੜ ਜਾਂਦਾ ਐ ਟਲ ਜਾਂਦਾ ਹੈ ਨਾ ਸੱਚ ਸੁਣ ਤੇ ਸਤਿਗੁਰ ਪਿਆਰਾ ਲੱਗੇ ਕੰਮ ਪਿਆਰਾ ਨਾਲ ਲੱਗੀ ਸੀ ਉਹਨਾਂ ਨੇ ਜੋ ਕਹਿਤਾ ਉਹ ਹੀ ਠੀਕ ਆ ਸੀ ਤਾਂ ਬੰਨਦੇ ਹੀ ਹੋਰ ਕਹਿੰਦੇ ਨਾ ਬੁਝੋੜ ਦੇ ਕੋ ਹਉ ਹਾਈ ਜਾਈ ਮਰਦੇ ਲੋ ਕਿਸੇ ਨੂੰ ਕੀ ਤਕਲੀਫ ਹੈ ਮਨ ਹਟ ਆਵੇ ਜਾਏ ਹਾਠੀ ਹੋ ਗਾ ਨਹੀਂ ਮਨਦਇ ਹੋ ਕੇ ਸਦੀ ਗੱਲ ਆਉਣ ਜਾਣ ਚ ਲੱਗੇ ਰਹਿੰਦੇ ਜੰਗਨਪੁਰ ਤੇ ਫਸੇ ਰਹਿਣਗੇ ਜੇ ਇੱਕ ਵੇਖ ਅਗਾਹ ਪਰੇ ਜੇ ਜਾਏ ਤਾਂ ਦੱਸ ਦੇ ਤਾਂ ਪਿਛੇ ਮੁੜ ਜਾਂਦੇ ਸੱਚ ਸੁਣ ਕੇ ਉਹ ਕਹਿੰਦੇ ਜੀ ਗੁਰਦਾਸ ਦੀਆਂ ਬਾਹਰਾਂ ਨੂੰ ਬੜੀ ਮੰਦੇ ਅਸੀਂ ਗੁਰਬਾਣੀ ਨੂੰ ਜੀ ਬੰਦੇ ਚਲ ਛੁੱਟੀ ਹੋ ਗਈ ਇੱਕ ਡੰਗ ਲਿਆਈ ਸੀ ਗੁਰਦਾਸ ਦੀ ਬਾਹਰ ਦੇੜੇ ਨੂੰ ਜੇ ਗੁਰਦਾਸ ਦੀ ਵਾਲ ਨੂੰ ਕੱਟ ਕੇ ਪਰੇ ਮਾਰਿਆ ਗੁਰਬਾਣੀ ਨੂੰ ਕਹਿੰਦੇ ਅਸੀਂ ਗੁਰਬਾਣੀ ਨੂੰ ਤਾਂ ਬੰਨਣ ਤੇ ਹਟ ਜਾਗੇ ਤੇ ਗੁਰਦਾਸ ਦੀ ਵਾਲ ਨੂੰ ਨਹੀਂ ਹਟਦੇ ਵਰਦਾਸ ਦੀ ਵਾਲ ਨੂੰ ਕੱਟਾ ਗੁਰਬਾਣੀ ਛੱਡ ਦਾਂ ਤਾਂ ਕੰਦਾ ਚਲੇਗਾ ਨਾ ਪਿੱਛੇ ਐ ਹਾਂਜੀ ਸਤਗੁਰ ਕੀ ਸੇਵਾ ਚਾਕਰੀ ਜੇ ਚੱਲੇ ਸਤਗੁਰ ਭਾਏ ਆਪ ਗਵਾਏ ਸਤਗੁਰੂ ਨੂੰ ਮਿਲੈ ਸਹਜੇ ਰਹੇ ਸਮਾਈ ਸਤਗੁਰੂ ਦੀ ਸੇਵਾ ਚੱਕਰੀ ਸਤਗੁਰੂ ਦੀ ਸੇਵਾ ਦਾ ਅਸਲ ਚੱਕਰੀ ਹੈ ਅਸਲ ਚੱਕਰੀ ਦਾ ਸਤਗੁਰੂ ਦੀ ਸੇਵਾ ਹੀ ਹੈ ਚੱਕਰ ਲੱਗੇ ਚੱਕਰੀ ਇਹ ਚੱਲੇ ਦੀ ਆਪ ਕਹੋਏ ਨੂੰ ਮਿਲ ਜੇ ਆਪਣਾ ਛੱਡ ਦੇਵੇ ਆਪਣੀ ਮਰਜ਼ੀ ਤਿਆਗ ਦੇਵੇ ਸਤਗੁਰੂ ਨੂੰ ਜਾ ਮਿਲਦਾ ਹੈ ਰਹੇ ਸਮਾਏ ਬਸ ਸਹੇਜ ਡਿਊਟਰਲ ਵਾਸਤਾ ਜੋਗੇ ਸਹੇਜ ਡਿਊਟਰਲ ਵਾਸਤਾ ਜੋਗੇ ਡਿਊਟਰਲ ਆਪਣੀ ਕੋਈ ਇੱਛਾ ਨਹੀਂ ਕੋਈ ਵਰਗੀ ਨਹੀਂ ਅਤਮਾਇ ਰਹੇ ਸਤਗੁਰੂ ਨਾਲ ਜੁੜਿਆ ਰਹੇ ਇਹ ਸਤਗੁਰੂ ਹੈ ਆਪ ਗਵਾਏ ਸਤਗੁਰੂ ਨੂੰ ਮਿਲੇ ਅਜਾ ਆਪ ਗਵਾਤਾ ਤੇ ਸਤਗੁਰੂ ਨੂੰ ਮਿਲੂ ਜਾ ਕੇ ਸ਼ਬਦ ਗੁਰੂ ਮਿਲੂ ਆਪ ਸਾਰਾ ਹੋਂ ਵੀ ਚਲੀ ਗਈ ਬੇਤ ਤੇ ਗਈ ਸੀ ਵੀ ਚਲੀ ਗਈ ਆਪ ਗਵਾਇਆ ਜਾਉ ਜਾਂ ਬਿਰਸ਼ੋ ਆਨਾਲ ਜੈਤੇ ਕੋ ਹੋ ਗਿਆ ਪੜੀ ਲਵਾ ਹੁੰਦਾ ਹੈ ਕੋ ਕੁਝ ਆਇਆ ਸਿਰਫ ਜਾਂ ਰਹੇ ਸਮਾਏ ਤੇ ਸਮਾਇਆ ਜੇ ਕਿਹਾ ਰਹੇ ਨੇ ਹਾਂਜੀ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲ ਮਿਲਾਈ ਇਨਾਂ ਨੂੰ ਨਾਮ ਲਈ ਵਿਸਰਦਾ ਅਨਾਨਕ ਤੰਨਾ ਦਾ ਹਾਵਲੋ ਦਸਰਾ ਉਹਨਾਂ ਨੂੰ ਲੋਭ ਲਈ ਵਿਸਰਦਾ ਸੱਚੇ ਮੇਲ ਬੁਲਾਏ ਜਿਹੜੇ ਸੱਚੇ ਨੇ ਮੇਲ ਸੱਚੇ ਰਹੀਦੀ ਕੁਰਬਾਨੀ ਦੇ ਸੱਚ ਨੇ ਹੀ ਰਾਨੂ ਬੁਲਾਤਾ ਸੱਚੀ ਬਾਣੀ ਦੇ ਜਿਹੜੇ ਨੂੰ ਬੁਲਾਤਾ ਜੇਹ ਜਿਨ੍ਹਾਂ ਦਾ ਇੱਕ ਬੋਲ ਇੱਕ ਚਿਤ ਸ਼ਬਦ ਗੁਰੂ ਨਾਲ ਜੋੜਦੇ ਉਹ ਵੀ ਵਿਛੜਦੇ ਫਿਰ ਕਰੇ ਜੀ ਆ ਵਿਸਰਦਾ ਲੋਭ ਠੀਕ ਇਹ ਨਾਮ ਪਦਾਰਥ ਨਾ ਜੀ ਨਾਨਕ ਨਾਮ ਨਾ ਵਿਚਰ ਹੈ ਹਾਂ ਜੀ ਹਾਂ ਜੀ ਫੇਰ ਕਿੱਥੇ ਤੋਂ ਚੱਲਦਾ ਠੀਕ ਹੈ ਇਹੀ ਅਸਲ ਚ ਨਾਮ ਹੈ ਜਿਹੜੀ ਆਪਾਂ ਲੋਚਦੇ ਹਾਂ ਜੀ ਹਾਂ ਜੀ ਇਹ ਸਤਿਗੁਰ ਨੂੰ ਮਿਲਦਾ ਨਾਮ ਹੈ ਜੀ ਬਿਲਕੁਲ ਸਤਿਗੁਰ ਨੂੰ ਦਿੰਦਾ ਕਿਹੜਾ ਨਾਮ ਸਤਿਗੁਰੂ ਹੈ ਠੀਕ ਹੈ ਜੀ ਸਤਿਗੁਰੂ ਨਾਮ ਸਤਿਗੁਰੂ ਨੂੰ ਦਿੰਦਾ ਹੈ ਜੀ ਠੀਕ ਹੈ ਜੀ ਹਾਂ ਪੌੜੀ ਖਾਨ ਮਲੂਕ ਕਹਾਂਇਂਦੇ ਕੋ ਰਹਿਣ ਨਾ ਪਾਈ ਗੜ ਮੰਦਰ ਗੱਤ ਗਿਰਿਆ ਕਿਛ ਸਾਥ ਨਾ ਜਾਈ ਖਾਨ ਮਲੂਕ ਕਹਾਂਇਂਦੇ ਕਹਾਂਦੇ ਨੇ ਆਪਣੇ ਅਬਰੂ ਮੁਸਲ ਬੋਲਦੀ ਮਲੂਕ ਖਾਨ ਕੋ ਰਹਿਣਾ ਪਾਈ ਰਣਾ ਨੇ ਨਾ ਬਾਹਰ ਨੇ ਸਾਥ ਕਲ ਮੰਦਰ ਗੱਤ ਗੀਰੀਆਂ ਬੜਬੜੇ ਕਿਲੇ ਬਣਾਏ ਨੇ ਗੱਟ ਉੱਤੇ ਪਲਾਸਟਰ ਕਰਕੇ ਇਹਦਾ ਦਾ ਕਲੇ ਦਾ ਗੱਟ ਇੱਕੋ ਜਿਹੀ ਦੀਦੀ ਕੁਝ ਸਾਹ ਦੰਲ ਜਾਏ ਕੁਝ ਵੀ ਸਾਹ ਦੀ ਜਾਨ ਨਾ ਤੇ ਬਾੜੀਆਂ ਬੁੱਧਰ ਬੜਬੜੇ ਕੜ ਕੇਲੇ ਕੁਝ ਨਹੀਂ ਸਾਹ ਜਨਵਾਲ ਇਮਾਰਤਾਂ ਉਹ ਇਮਾਰਤਾਂ ਜਿਨ੍ਹਾਂ ਵਿੱਚ ਪਕੜ ਚੂਨੇ ਦੀ ਹੋਵੇ ਗੀਰ ਦਾ ਮਤਲਬ ਪਕੜ ਹੁੰਦਾ ਪੂਰੇ ਦਾ ਬਲਾਸਟਰ ਕੀਤਾ ਹੋਵੇ ਠੀਕ ਹੈ ਦੂਸਰੇ ਚੂਨੇ ਦੇ ਵਿੱਚ ਨੂੰ ਕਾਫੀ ਪੱਕੀ ਇਮਾਰਤ ਸਮਝਿਆ ਜਾਂਦਾ ਹੈ ਜੀ ਚਲੋ ਠੀਕ ਹੈ ਉਹ ਸਾਥ ਨਹੀਂ ਜਾਂਦੀ ਇੱਥੇ ਮਾਇਆ ਨੇ ਤਾਂ ਇੱਥੇ ਰਹਿ ਜਾਣਾ ਹਾਂ ਜੀ ਪਾਉਣ ਵੇਗ ਤਰੇ ਗਿ ਤਰੇ ਗਿ ਚਤੁਰਾਈ 36 ਅੰਮ੍ਰਿਤ ਪ੍ਰਕਾਰ ਕਰਨ ਬਹੁ ਮੈਲ ਵਧਾਈ ਪੌਣ ਦੇ ਪੌਣ ਦੇ ਨਾਲ ਗੱਲਾਂ ਕਰਨ ਵਾਲੇ ਘੋੜੇ ਉੱਤੇ ਸੋਨੇ ਦੀਆਂ ਪਾਲਕੀਆਂ ਚੀਜ਼ਾਂ ਦਾ ਪਰ ਕੇ ਤੁਸੀਂ ਰੱਖ ਲਿਆ ਟੋਪਾਂ ਉੱਪਰ ਮੋੜ ਨੂੰ ਖਾਸ ਕਰ ਸਾਡੀ ਥੋੜੀ ਏਗਾ ਸੇਕਾਰ ਦੀ ਅਕਲ ਤੇਰਾਈ ਪੜਾ ਕਹੌਣ ਦੀ ਬੜਾ ਬੁੱਲ ਦੀ ਜਤਰਾਈ ਹੈ ਆਪਣੀ ਇੱਜਤ ਕਰਾਉਣ ਮੈਲ ਵਧਾਈ 36 ਪ੍ਰਕਾਰ ਦੇ ਅੰਮ੍ਰਿਤ ਖਾਨਾ ਅੰਦਰ ਵਸੇੜਾ ਢੱਡ ਚ ਬਣਾ ਲਵਦੀ ਹੋਈ ਹੈ ਤੇ ਸਰੀਰ ਵਧਿਆ ਉਹ ਆ ਸਾਰੀ ਹਾਂਜੀ ਨਾਨਕ ਜੋ ਦੇਵੈ ਤਿਸੇ ਨਾ ਜਾਣਨੀ ਮਨ ਮੁਖੀ ਦੁਖ ਪਾਈ ਜੋ ਮਨਾਂ ਨੇ ਜਿਹੜਾ ਦੇਰ ਹੈ ਇਹ ਸਾਰੇ ਪਦਾਰਥ ਜਿਹੜਾ ਉਹ ਨਹੀਂ ਦੀਦਾ ਤੇ ਸਾਨੂੰ ਜਾਣ ਨਹੀਂ ਦਿਨ ਉਹ ਈਡੀ ਉਹ ਦੀ ਸਮਝ ਨਹੀਂ ਹੈ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹਨੂੰ ਮੁੱਖੀ ਦੁੱਖ ਪਾਈ ਦੁੱਖ ਪਾਊਗਾ ਹੈ ਇਹ ਜੱਟ ਨੇ ਪੈ ਜਾਣੇ ਨੇ ਇਹਨਾਂ ਦਾ ਬਹੁਤ ਬੜਾ ਬਧਾਇਆ ਜੱਟ ਬੜੇ ਔਖੇ ਹੋਣਗੇ ਬੜਾ ਦੁਖੀ ਹੋਊਗਾ ਉਹ ਵੀ ਲੱਗ ਸਕਦੀਆਂ ਨੇ ਇਹਨਾਂ ਪਦਾਰਥਾਂ ਨਾਲ ਕਾਫੀ ਦੁੱਖ ਦਾ ਕਾਰਨ ਹੋ ਜਾਂਦੀਆਂ ਠੀਕ ਹੈ ਜੀ ਇੱਥੇ 23ਵੀਂ ਪੜ੍ਹਦੀ ਸਮਾਪਤੀ ਹੈ ਜੀ